ਸਤਿ ਕਿਰਨਪਾਲ ਸਿੰਘ ਜੀ ਆਪ ਜੀ ਪਾਸ ਬੇਨਤੀ ਕਰਾਂਗਾ ਆਪ ਜੀ ਆਪਣੇ ਸਾਜ਼ ਲਿਆਓ ਕਿ ਟਾਈਮ ਸਾਡੇ ਕੋਲ ਬੜਾ ਸ਼ਾਰਟ ਹੈ ਇੱਕ ਬੜਾ ਔਖਾ ਕੰਮ ਹੁੰਦਾ ਹੈ ਕਿ ਜਿਹੜੀ ਚੀਜ਼ 1 ਘੰਟੇ ਜਾਂ ਅੱਧੇ ਘੰਟੇ ਜਵਜਣੀ ਹੋਵੇ ਤੇ ਉਹਨੂੰ 15 ਮਿੰਟ ਚ ਉਹ ਕੇ ਪੇਸ਼ ਕੀਤਾ ਜਾਵੇ ਜਾਂ ਗਾ ਕੇ ਪੇਸ਼ ਕੀਤਾ ਜਾਵੇ ਬੜਾ ਮੁਸ਼ਕਲ ਹੁੰਦਾ ਹੈ ਸੰਸੁਰਜੀਤ ਸਿੰਘ ਜੀ ਮੈਂ ਤਨਵਾਦ ਕਰਦਾ ਕਿ ਇਹਨਾਂ ਨੇ ਮੇਰੀ ਅਰਜ਼ ਮੰਨੀ ਹੈ ਔਰ ਇਸ ਗਾ ਨੂੰ ਆਪਣੇ ਜੋ ਇਹਨਾਂ ਨੇ ਤਿਆਰੀ ਕੀਤੀ ਸੀ ਰਾਗ ਸਰਸwati ਇਹਨਾਂ ਨੇ ਬਹੁਤ ਹੀ ਛੋਟਾ ਕਰਕੇ ਸਾਧ ਸੰਗਤ ਚ ਇਹਨਾਂ ਨੇ ਪੇਸ਼ ਕੀਤਾ ਹੈ ਲੇਕਿਨ ਇਸ ਰਾਗ ਨੂੰ ਮਨ ਪਤਾ ਕਿ ਟਾਈਮ ਬਹੁਤ ਹੀ ਲੱਗਦਾ ਖਾਸ ਕਰਕੇ ਸਾਜ਼ ਉੱਤੇ ਸਾਜ਼ ਉੱਤੇ ਵਜਾਣਾ ਹੋਵੇ ਤੇ ਸਾਡੇ ਕਿਰਪਾਲ ਸਿੰਘ ਜੀ ਤੋਂ ਆਪ ਸਾਰੇ ਹੀ ਵਾਕਿਫ ਹੋ ਕਿਉਂਕਿ ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਇਹਨਾਂ ਦਾ ਬਾਇਓ ਡਾਟਾ ਦਿੰਦਾ ਤਾਂ ਚੰਗਾ ਵੀ ਨਹੀਂ ਸੀ ਲੱਗਦਾ ਸੋ ਇਹ ਇੱਥੇ ਪਹੁੰਚ ਗਏ ਨੇ ਹੁਣ ਇਹਨਾਂ ਦਾ ਬਾਇਓ ਇਸ ਤਰ੍ਹਾਂ ਦੇ ਸਕਦਾ ਮੈਂ ਕਿ ਜਿੰਨੀ ਦੇਰ ਤੋਂ ਮੈਂ ਅਫਰੀਕਾ ਤੋਂ ਆਇਆ ਨਾ 1976 ਚ ਉਦੋਂ ਤੋਂ ਮੈਂ ਇਹਨਾਂ ਨੂੰ ਜਾਣਦਾ ਉਦੋਂ ਪਹਿਲਾਂ ਨਹੀਂ ਸੀ ਜਾਣਦਾ ਉਦੋਂ ਇਹ ਤਬਲਾ ਵਜਾਉਂਦੇ ਹੁੰਦੇ ਸੀ ਤੇ ਸੰਤ ਰਿਪਨਮਨ ਸਿੰਘ ਜੀ ਹੁਣ ਆਪਾਸੋਂ ਇਹ ਤਬਲਾ ਸਿੱਖਦੇ ਸਨ ਔਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹਨਾਂ ਨੇ ਇੱਕ ਦੋ ਵਾਰੀ ਆਪਣਾ ਸੰਗਤ ਕਰਨ ਵਾਸਤੇ ਆਪਣਾ ਤਬਲਾ ਸੁਨਾਇਆ ਔਰ ਸੱਚੇ ਪਾਤਸ਼ਾਹ ਨੇ ਖੁਸ਼ ਹੋਏ ਇਹਨਾਂ ਤੇ ਇਹਨਾਂ ਨੂੰ ਆਗਿਆ ਦਿੱਤੀ ਕਿ ਤੁਸੀਂ ਇੰਡੀਆ ਆਓ ਤੇ ਤੁਹਾਨੂੰ ਕਿਸੇ ਉਸਤਾਦ ਕੋਲੋਂ ਕੁਝ ਸਿਖਾਣਾ ਹੈ ਸੋ ਇਹਨਾਂ ਨੇ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਔਰ ਇੰਡੀਆ ਸੱਚੇ ਪਾਛੇ ਦੇ ਪਾਸ ਜਾ ਕੇ ਤੇ ਉਹਨਾਂ ਤੋਂ ਸੱਚੇ ਪਾਛੇ ਹੁਕਮ ਅਨਸਾਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ ਜੋ ਬੜੇ ਹੀ ਮਸ਼ਹੂਰ ਪ੍ਰਸਿੱਧ ਐਸੋਲੇ ਟੌਪ ਦੇ ਸੰਤੂਰ ਵਾਦਕਰ ਹਨ ਉਹਨਾਂ ਤੋਂ ਇਹਨਾਂ ਨੇ ਆਪਣਾ ਆਪਣੀ ਇਹ ਸਿੱਖਿਆ ਪ੍ਰਾਪਤ ਕੀਤੀ ਹੈ ਬਾਕੀ ਦੇ ਜੋ ਸੱਜਣ ਹਨ ਉਹਨਾਂ ਦਾ ਮੈਂ ਪਹਿਲਾਂ ਹੀ ਬਾਇਓ ਦੇ ਚੁੱਕਾ ਹਾਂ ਪਰ ਕਿਉਂਕਿ ਨਾਲ ਇਹਨਾਂ ਦੇ ਸੰਗਤ ਕਰਨਗੇ ਤੇ ਉਹਨਾਂ ਦਾ ਮੈਂ ਨਾਮ ਜ਼ਰੂਰ ਲਵਾਵਾਂਗਾ ਤੇ ਤਬਲੇ ਤੇ ਸ਼੍ਰੀ ਚੰਦਰਮੋਹਨ ਜੀ ਦੇਖੋ ਜੀ ਜਿਹੜਾ ਬੰਦਾ ਆਪ ਹਸਮੁਖ ਹੋਵੇ ਤੇ ਉਹਨੂੰ ਸਾਰੇ ਹਸ ਕੇ ਬੁਲਾਉਂਦੇ ਨੇ ਕੋਈ ਇਹਨਾਂ ਨੂੰ ਪੰਡਿਤ ਚੰਦਰਮੋਹਨ ਕਹ ਰਿਹਾ ਕੋਈ ਕੋਈ ਪੰਡਿਤ ਸੀਐਮ ਕਹ ਰਿਹਾ ਕੋਈ ਸੀਐਮ ਕਹ ਰਿਹਾ ਹਾਂਜੀ ਸੰਤ ਕਿਰਨਪਾਲ ਸਿੰਘ ਜੀ ਰਾਗ ਕਿਰਵਾਨੀ raag kirwani jastra suraj singh ji ne bajaya raag saraswati oh hai dakhan da raag karnatik ke raag us kudrati sab bade kirpa de na as ehvi raag south indian kirwani to mai keha eh da mood raag ta acha lag reya mood yani shringaar ras khesode shringaar ras da raag hai